ਸ਼ਲੋਕ ਮਹੱਲਾ ਪੰਜਵਾਂ ਸੁਣ ਸੱਜਣ ਪ੍ਰੀਤਮ ਆ ਮੈਂ ਸਤਗੁਰ ਦੇ ਦਿਖਾਲ ਹਉ ਦੇਵਾ ਮਨ ਆਪਣਾ ਨਿਤ ਹਿਰਦੇ ਰੱਖਾਂ ਸਮਾਲ ਪਰ ਗੁਰਮੁਖ ਹੈ ਉਹ ਕਹੈ ਅਈ ਗੁੱਦ ਸੁਣ ਸੱਜਣ ਪ੍ਰੀਤਮ ਮੇਰਿਆ ਮੈਂ ਸਤਗੁਰ ਦੇ ਉਹ ਦਿਖਾਲ ਮੈਨੂੰ ਵੀ ਮੇਰਾ ਸਤਗੁਰ ਦਿਖਾਲ ਦੇ ਮੈਨੂੰ ਵੀ ਮੇਰੇ ਸਤਗੁਰ ਦੇ ਦਰਸ਼ਨ ਕਰਾ ਦੇ ਸਮਝਾ ਦੇ ਮੇਰੇ ਵੀ ਅੰਦਰ ਹੈਗਾ ਹਾਂ ਕਿਸ ਤੇ ਵਲ ਮੈਂ ਆਪਣਾ ਮੈਂ ਵੀ ਆਪਣਾ ਮਨ ਸਤਿਗੁਰੂ ਨੂੰ ਆਪਣੇ ਨੂੰ ਦੇ ਦਵਾਂ ਦੇਵਾ ਕਿਸ ਕਿਸ ਨੂੰ ਮੈਂ ਆਪਣਾ ਨੇ ਤੇ ਹਿਰਦੇ ਰੱਖਾਂ ਸੰਭਾਲ ਨੇ ਆਪਣੇ ਹਿਰਦੇ ਚ ਸੰਭਾਲ ਕੇ ਰੱਖਾ ਉਹਨੂੰ ਆਪਣੇ ਸਤਿਗੁਰੂ ਨੂੰ ਉਹਦੇ ਨਾਲ ਉਹਦਾ ਦਰਸ਼ਨ ਕਰਾ ਦੇ ਮੈਨੂੰ ਉਹਦੀ ਸੋਝੀ ਕਰਾ ਦੇ ਹਾਂਜੀ ਇੱਕ ਸਤਗੁਰ ਬਾਹਰਾ ਤਰੇਕ ਜੀਵਨ ਸੰਸਾਰ ਜਨ ਨਾਨਕ ਸਤਗੁਰ ਤਿਨਾਂ ਮਿਲਾਇਓਨ ਜਿਨ ਸਦਹੀ ਵਰਤੈ ਨਾਲ ਇੱਕ ਬਾਹਰਾ ਕੇਵਲ ਇੱਕ ਸਤਗੁਰ ਤੇ ਜਿਹੜਾ ਬਿਨਾ ਬਗੈਰ ਇਹਨੂੰ ਸਾਰਾ ਜੀਵਨ ਬੀਰਤ ਹੈ ਤਰੇਕ ਜੀਵਨ ਇੱਕ ਨਾਲ ਇਹਦਾ ਜੀਵਨ ਉਸ ਸਤ ਜੀਵਨ ਉਹ ਅਸਲੀ ਜੀਵਨ ਹੈ ਉਹੀ ਸਵਰਗ ਦਾ ਜੀਵਨ ਹੈ ਬਾਕੀ ਦਾ ਸਾਰਾ ਕੀ ਜੀਵਨ ਹੈ ਮਿਰਗ ਜੀਵਨ ਹੈ ਸਿਰਕਾਰ ਜੀਵਨ ਸਰਕਾਰ ਦਾ ਜੀਵਨ ਕਿੱਥਰੇ ਜਨ ਨਾਨਕ ਸਤਗੁਰ ਤੇ ਨਾਲ ਮਿਲਾਇਓ ਨ ਜਨ ਨਾਲ ਜਨ ਨਾਨਕ ਕਹਿੰਦਾ ਸਤਗੁਰ ਤੇ ਨਾਲ ਮਿਲਾਇਓ ਨ ਸਤਗੁਰ ਨਾਲ ਮੇਲ ਮਲਾਪ ਹੋਇਆ ਜਿਤ ਸਾਦੇ ਹੀ ਵਰਤੈ ਨਾਲ ਜਿਹੜੇ ਸਾਧੀ ही ਨਾਲ ਵਰਤੇ ਨੇ ਜਿਹੜੇ ਸਾਧੀ ਅੰਤਰਾਤਮ ਦੀ ਆਵਾਜ਼ ਨਾਲ ਜੁੜ ਕੇ ਚੱਲੇ ਨੇ ਅੰਤ ਵੇਲੇ ਸਤਗੁਰ ਨੇ ਉਹਨਾਂ ਦੀ ਬਾਹ ਫੜੀ ਆ ਜਿਹੜਾ ਨੇ ਸਦਾ ਹੀ ਸਤਗੁਰ ਦਾ ਪੱਲਾ ਨਹੀਂ ਛੱਡਿਆ ਜਿਉਂਦੇ ਜੀ ਹਾਂਜੀ ਮਹੱਲਾ ਪੰਜਵਾਂ ਮੇਰੇ ਅੰਤਰ ਲੋਚਾ ਮਿਲਣ ਕੀ ਕਿਉ ਪਾਵਾਂ ਜੋ ਮੇਲੇ ਪ੍ਰੀਤਮ ਮੋਹੇ ਮੇਰੇ ਵੀ ਅੰਦਰ ਇੱਛਾ ਮਿਲਣ ਦੀ ਹੈ ਕਿਉਂ ਬਾਵਾ ਪ੍ਰਭ ਤੋਏ ਪ੍ਰਭ ਤੇਰੇ ਤੇ ਕਿਵੇਂ ਪੜਾਂ ਤੇਰੀ ਕੁੰਜੀ ਕਿੱਥੋਂ ਬਾਵਾ ਕਿਵੇਂ ਤੇਰਾ ਬੱਲਾ ਤੇਰੀ ਸੋਜੀ ਕਿਵੇਂ ਪਾਵਾਂ ਕੋਈ ਐਸਾ ਸੱਜਣ ਲੋੜ ਲਾਓ ਕੋਈ ਐਸਾ ਸੱਜਣ ਗੁਰੂ ਘਟੋੜ ਲੱਭ ਲਓ ਲੋੜ ਮਹਿਸੂਸ ਕਰੋ ਜੋ ਮੇਲੇ ਪ੍ਰੀਤਮ ਹੋਏ ਜਿਹੜਾ ਮੇਰੇ ਪ੍ਰੀਤਮ ਨੂੰ ਮਿਲਾ ਦੇਵੇ ਐਸਾ ਕੋਈ ਸੱਜਣ ਲੱਭੋ ਹੋ ਵੀ ਲੋਰ ਮਹਿਸੂਸ ਕਰੋ ਹਾਂਜੀ ਠੀਕ ਹੈ ਜੀ ਪ੍ਰਭ ਨੂੰ ਮਿਲਣ जी, ਉਹ ਗੱਲ ਹੈ ਜੀ ਆਪਣੇ ਮੂਲ ਨੂੰ ਬਣਨ ਦੀ ਗੱਲ ਹੈ ਠੀਕ ਹੈ ਜੀ ਗੁਰਪੂਰੇ ਮੈਂ ਲਾਇਆ ਜਤ ਦੇਖਾਂ ਤਤ ਸੋਏ ਜੇ ਨਾਨਕ ਸੋ ਪ੍ਰਭ ਸੇਵਿਆ ਕਿਸ ਜੇਵੜ ਅਵਰ ਨਾ ਕੋਈ ਪੂਰਾ ਸਤਗੁਰ ਨੇ ਸਤੁਰਤਾ ਦਾ ਖਾਲੀ ਹੋ ਕੋਈ ਜਾਂ ਨਾਨਕ ਸੋ ਪ੍ਰਭ ਸੇਵਿਆ ਤਿਸ ਜੇ ਵਡਾ ਬਨ ਕੋਈ ਜਿਨ ਨਾਨਕ ਨੇ ਉਹ ਪ੍ਰਭ ਫਿਰ ਆਪਣੇ ਅੰਦਰਲਾ ਪ੍ਰਭ ਸੇਵਿਆ ਤਿਸ ਜੇ ਵਡਾ ਬਨ ਕੋਈ ਜਿਹਦੇ ਜਿੱਟਾ ਵੱਡਾ ਹੋਰ ਕੋਈ ਨਹੀਂ ਜਿਹੜਾ ਸਭ ਦੇ ਅੰਦਰ ਹੀ ਹੈ ਹਾਂਜੀ ਕੌਲੀ ਦੇਵਨ ਹਾਰ ਦਾ ਤਾਰ ਕਿਤ ਮੁਖ ਸਲਾਹੀ ਹੈ ਜਿਸ ਰੱਖੇ ਕਿਰਪਾ ਧਾਰ ਰਿਜਕ ਸਮਾਹੀ ਹੈ ਕਿਹੜੇ ਮੂੰਹ ਨਾਲ ਤੁਸੀਂ ਸਲਾਹ ਕਰੀਏ ਖਾਣ ਵਾਲੀ ਚੀਜ਼ ਹੈ ਸਭੇ ਦੇ ਮੂੰਹ ਤਾਂ ਚੋਗਾ ਜਿੰਨਾ ਵੀ ਪੁੱਛਦਾ ਉਹਦਾ ਹੀ ਦਿੱਤਾ ਨਾਲ ਕੀ ਸਲਾਹ ਕਰੀਏ ਜਿਹੜੇ ਮੂੰਹ ਨਾਲ ਸੰਸਾਰੀ ਰਾਸ ਸਾਰਾ ਜਿੰਨਾ ਅਸੀਂ ਖਾਂਦੇ ਆ ਸਲਾਹਾਂ ਦੇ ਜੋਗ ਉਹਦੀ ਵੱਡਾ ਉਹ ਅਸੀਂ ਸਾਡਾ ਮੁਖ ਸਲਾਹਾ ਦੇ ਲੈ ਕੇ ਨਹੀਂ ਉਹਦੀ ਛਲਾਗਾ ਕਰਨ ਮੁੱਖ ਬੁੱਧੀ ਨੂੰ ਕਹਾਂਗੇ ਜੀ ਉਹ ਬੁੱਧੀ ਜੋ ਕੋਤੇ ਨੇ ਮੁਖੇ ਆਓ ਅੱਛਾ ਜੀ ਕੋਈ ਨਾ ਕਿਸੇ ਹੀ ਵਸ ਸਭਨਾ ਇੱਕ ਧਰ ਪਾਲੇ ਬਾਲਕ ਵਾਂਗ ਦੇਖੇ ਆਪ ਕਰ ਕੋਈ ਕਿਸੇ ਦਾ ਅਧੀਨ ਨਹੀਂ ਕੀਤਾ ਉਹਨੇ ਦੇਖੋ ਸਸ ਸਭਨਾ ਇੱਕ ਧਰ ਇੱਕ ਆਪ ਹੀ ਸਾਰਿਆਂ ਆਸਰਾ ਹੈ ਉਹ ਪਰ ਐਕੇ ਅਸੀਂ ਚਾਹੇ ਇਸ ਗੱਲ ਨੂੰ ਮੰਨਿਏ ਚਾਹੇ ਨਾ ਮੰਨਿਏ ਗੁਰਮੁਖਾਂ ਨੂੰ ਜੇ ਕਾਨੂੰ ਤਾਂ ਮੰਨਣੀ ਪਊਗੀ ਜੇ ਮੰਨਣੀ ਪਊਗੀ ਤੇ ਫਿਰ ਤਾਂ ਸਾਰੇ ਆਜ਼ਾਦ ਬਣਾਏ ਨੇ ਉਹਨੇ ਆਜ਼ਾਦੇ ਰਹਿਣ ਦੋ ਸਾਰਿਆਂ ਨੂੰ ਪਾਲੇ ਬਾਲਕ ਵਾਂਗ ਦੇ ਕੇ ਆਪ ਕਰ ਬਾਲਕਾਂ ਵਾਂਗ ਪਾੜਦਾ ਹਰੇਕ ਨੂੰ ਹੱਥ ਦੇ ਕੇ ਜਿਵੇਂ ਹੱਥਾਂ ਦੇ ਬਾਲਕ ਪਾੜੀਦੇ ਨੇ ਸਭ ਨੂੰ ਐ ਬਾਲਕਾਂ ਵਾਂਗੂ ਪਾੜਦਾ ਤੇ ਫਿਰ ਬੈਦ ਵਿਰੋਧ ਕੀ ਦੇਣਾ ਕਰੀਏ ਕਿਉਂ ਕਹੀਏ ਅਸੀਂ ਫਲਾਣੇ ਨੂੰ ਪਾੜਦੇ ਹਾਂ ਫਲਾਣਾ ਮੇਰੇ ਸਿਰ ਤੇ ਹੈ ਯਾ ਭੈ ਦੇ ਸਿਰਦੇ ਸਰਤੇ ਹੂੰ ਇਹ ਪਰਮ ਪਾਲਣਾ ਵੀ ਚਾਹੀਦਾ ਸਰਬਾਣੀ ਆ ਗਿਆ ਨਹੀਂ ਦਿੰਦੀ ਇਸ ਪਰਮ ਪਾਲਣ ਦੀ ਹਾਂਜੀ ਇਹਦਾ ਭਾਵੇਂ ਕਿ ਆਪਣੇ ਹੱਥਾਂ ਨਾਲ ਸਭ ਨੂੰ ਪਾਲਦਾ ਕਿ ਸਭ ਨੂੰ ਹੱਥ ਦਿੱਤੇ ਹੋਏ ਤਾਂ ਕਿ ਉਹ ਪਾਲਣਾ ਕਰ ਸਕਣ ਹੁਕਮ ਉਹਦਾ ਹੱਥ ਹੀ ਹੈ ਹੁਕਮ ਨਾਲ ਪਾਲਦਾ ਨਹੀਂ ਕਾਰ ਜਿਹੜਾ ਹੈਗਾ ਕਾਰ ਮੁਕਤਾ ਹੈ ਇਹਦਾ ਮਤਲਬ ਇਹ ਪਲੂਰਲ ਹੈ ਇਹ ਬਹੁਵਚਨ ਹੈ ਹੁਕਮ ਗੜਾ ਇੱਕੋ ਹੀ ਹੈ ਹੁਕਮ ਚੱਲਦਾ ਹੀ ਰਹਿੰਦਾ ਜਾ ਦੇ ਜਿਕੇ ਮਿਲਦਾ ਉਹਨੇ ਵਿੱਚ ਪਾਣੀ ਮਿਲਦਾ ਧੰਨ ਵੀ ਮਿਲਦਾ ਅਰੇ ਜਿਕੇ ਕਿਹੜਾ ਆਂ ਉਹ ਕੋ ਲਗਾਤਾਰ ਚੱਲਦਾ ਠੀਕ ਹੈ ਜੀ ਹਾਂ ਜੀ ਸਰਦਾ ਆਨੰਦ ਬినੋਦ ਸਰਬ ਧਾਰ ਸਮਰੱਥ ਹੋਂ ਤਿਸ ਕੁਰਬਾਨੀ ਹੈ ਆਨੰਦ ਬినੋਦ ਰਹਿਣਾ ਉਹਨੂੰ ਕਦੇ ਕੋਈ ਚਿੰਤਾ ਉਹਨੂੰ ਕੋਈ ਚਿੰਤਾ ਨਹੀਂ ਕਛੂ ਨਾ ਜਾਣੀ ਹੈ ਉਹ ਕਿਸੇ ਨੂੰ ਕੋਈ ਪਰਵਾਹ ਨਹੀਂ ਕਿਸੇ ਦੀ ਕਰਦਾ ਵੀ ਕੋਈ ਕਿ ਕੋਈ ਵਿਗਨ ਪਾ ਦੂਗਾ ਜਾਂ ਉਹਨੂੰ ਕੋਈ ਖਤਰਾ ਹੈ ਕਿਸੇ ਤੋਂ ਐਸੀ ਕੁਛ ਨਹੀਂ ਉਹਨੂੰ ਚਿੰਤਾ ਕਿਸੇ ਦੀ ਹੋਏਗੀ ਸਰਵਤਾਰ ਸਮਰੱਥ ਸਾਰੀਆਂ ਗਲਾਂ ਦੇ ਸਮਰੱਥਾ ਉਹ ਸਭ ਸ਼ਕਤੀਆਂ ਨੇ ਉਹਦੇ ਵਿੱਚ ਹੋ ਕੁਰਬਾਨੀ ਹੈ ਮੈਂ ਉਹਦੇ ਕੁਰਬਾਨ ਹੋ ਕੋਈ ਚੀ ਕੰਮ ਵਿੱਚ ਕੋਈ ਕੋਈ ਰੁਕਾਵਟ ਵਿਗਨ ਪਾ ਸਕਦਾ ਉਹਨੂੰ ਕੋਈ ਚਿੰਤਾ ਨਹੀਂ ਕਿਸੇ ਦੀ ਕੋ ਪ੍ਰਵਾਹੀ ਉਹਨੂੰ ਇਹ ਕਰਕੇ ਐਡੇ ਸ਼ਕਤੀਸ਼ਾਲੀ ਸਮਰੱਥ ਤੋਂ ਮੈਂ ਕੁਰਬਾਨ ਗਾਇਏ रात ਦਿਨੰਤ गावन ਜੋਗਿਆ ਜੋ ਗੁਰ ਕੀ ਪੈਰੀ ਪਾਹੇ ਤਿੰਨੀ ਹਰ ਰਸ ਭੋਗ ਗਿਆ ਗਾਵਨ ਜੋਗਿਆ ਹੈ ਗਾਵਨ ਜੋਗ ਤੂੰ ਗਾਵਨ ਜੋਗ ਹੈ ਤੈਨੂੰ ਗਾਇਆ ਜਾਣਾ ਚਾਹੀਦਾ ਹੈ ਤੈਨੂੰ ਗਾਣਾ ਜੋਗ ਹੈ ਹੋਰਨਾਂ ਨੂੰ ਗਾਣਾ ਨਹੀਂ ਜੋਗ ਔਰ ब्रह्मा विष्णु शिव जी ਆਦਮੀ ਨੂੰ ਆਦਮੀ ਦਾ ਗੁਣ ਗਾਇਨ ਕਰਨਾ ਯੋਗ ਨਹੀਂ ਹੈ ਆਦਮੀ ਇਸ ਕਾਬਲੇ ਨਹੀਂ ਕਿ ਉਹ ਦਾ ਗੁਣ ਗਾਇਨ ਕੀਤਾ ਜਾਵੇ ਚਾਹੇ ਕੋਈ ਹਰ ਰਸ ਤੋਗਿਆ ਜਿਹੜਾ ਨੇ ਸਤਗੁਰ ਦੀ ਚੜ੍ਹਨੀ ਲੱਗੇ ਨੇ ਆਪਣੀ ਮਨਮਰਜ਼ੀ ਛੱਡੀ ਹੈ ਆਪਣੀ ਅੰਦਰ ਆਤਮਾ ਦੀ ਆਵਾਜ਼ ਸੁਣਦੇ ਨੇ ਉਹਨਾਂ ਨੇ ਹਰ ਰਸ ਤੋਗ ਲਿਆ ਉਹਨਾਂ ਨੂੰ ਹਰ ਰਸ ਦੀ ਪ੍ਰਾਪਤੀ ਹੁੰਦੀ ਹੈ ਠੀਕ ਹੈ ਜੀ